ਦੱਖਣੇ ਮਹੱਲਾ ਪੰਜਵਾਂ ਆ ਗਾਹਾਂ ਕੂੰ ਤਰੰਗ ਪਿੱਛਾ ਫੇਰਨਾ ਮੁਹੜੜਾ ਨਾਨਕ ਸਿੱਝਿ ਵੇਹਾ ਵਾਰ ਬੋਹੜ ਨਾ ਹੋਵੀ ਜਨਮੜਾ ਆ ਗਾਹਾਂ ਕੂੰ ਤਰੰਗ ਅੱਗੇ ਨੂੰ ਪੈਰ ਕੋਟ ਅੱਗੇ ਨੂੰ ਪਿੱਛੇ ਨੂੰ ਨਾ ਦੇਖਣ ਤੁਰਤਾ ਪੈਣ ਅਗਾ ਪੈਰ ਦੇ ਪੁੱਟੇ ਨਾ ਉੱਲੀ ਬਾਟ ਪਿੱਛਾ ਫੇਰਨਾ ਮੋੜਣਾ ਗੋੜਣਾ ਆ ਉਹ ਪਿਛੇ ਨੂੰ ਨਾ ਫੇਰ ਮੋੜੇ ਦੇ ਉੱਤੇ ਦੀ ਤੇ ਜਿੰਨੂ ਫੇਰ ਕੇ ਕੀ ਦੇਖਦਾ ਜਿੰਨਾ ਦੁਰ ਗਿਆ ਤੈਨੂੰ ਪਤਾ ਨਹੀਂ ਛਲਿਆ ਹੈ ਜਿਹੜਾ ਪਿੱਛੇ ਜੋ ਲੰਘ ਗਿਆ ਉਹ ਨਹੀਂ ਯਾਦ ਕਰੀਦਾ ਹੁੰਦਾ ਕਿੱਥੇ ਰਹਿੰਦੇ ਤੇ ਕਿਹੜਾ ਖੂਸੀ ਕੋਲ ਦੋਸਤੇ ਜੋਟੋੜੇ ਭੁੱਲ ਜਾਈਦਾ ਸਭ ਪਿੱਛਾ ਸੁਪਨਾ ਸੀ ਦੇਖਿਆ ਤੇ ਖਤਮ ਹੋ ਗਿਆ ਅੱਗੇ ਦੀ ਗੱਲ ਕਰਾਂ ਸਿੱਜ ਅਵੇਹਾ ਵਾਰ ਪੂਰਨ ਹੋਵੀ ਜਨਮ ਨਾਨਕ ਸਿੱਜ ਅਵੇਹਾ ਵਾਰ ਇਸੇ ਵਾਰ ਸੁਰਜਾ ਲੈ ਤਾਣੀ ਸਾਰਿਓ ਜੇ ਉੜੀ ਹੋਈ ਰਹਿ ਗਈ ਦੁਬਾਰਾ ਜਨਮ ਲੈਣਾ ਪੈਜੂਗਾ ਸਾਰੀ ਤਾਣੀ ਸੁਰਜਾ ਲੈ ਜਿੰਨੇ ਪਰਪਲੇਖ ਨੇ ਦੂਰ ਕਰ ਲੈ ਪੂਰਨ ਨਾ ਹੋਵੇ ਜਨਮ ਦਾ ਜਿਸ ਕਰਕੇ ਦੁਬਾਰਾ ਜਨਮ ਨਾ ਹੋਵੇ ਜੇ ਇੱਕ ਗੁਰਜ ਵੀ ਅੜੀ ਰਹਿ ਗਈ ਦੁਬਾਰਾ ਜਨਮ ਲੈਣਾ ਪੈਜੂ ਹਾਂਜੀ ਮਹੱਲਾ ਪੰਜਵਾਂ ਸੱਜਣ ਮੈਂਡਾ ਚਾਈਆ हब ਕਹੀ ਦਾ ਮਿੱਤ ਹੱਬੇ ਜਾਣੇ ਆਪਣਾ ਕਹੀ ਨਾ ਠਾਹੇ ਚਿੱਤ ਹਾਂ ਸੱਜਣ ਮੈਂਡਾ ਚਾਈਆ ਹੱਬੇ ਕਹੀ ਦਾ ਮਿੱਤ ਮੇਰਾ ਸੱਜਣ ਉਹ ਹੈ ਜਿਹੜਾ ਸਾਰਿਆਂ ਦਾ ਹੀ ਚਾਹ ਕਰਦਾ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਸਾਰੇ ਯੋਦ ਆਪਣੇ ਨੇ ਅੱਬ ਕਈ ਦਾ ਮਿੱਤ ਸਾਰੇ ਉਹਨੂੰ ਕਹਿੰਦੇ ਨੇ ਮਿੱਤ ਉਹਨੂੰ ਵੀ ਸਾਰੇ ਮਿੱਤ ਕਹਿੰਦੇ ਨੇ ਬਾਲਾ ਉਹਨੂੰ ਵੀ ਕੋਈ ਕਹਿੰਦਾ ਉਹ ਸਾਰਿਆਂ ਨੂੰ ਚਾਹੁੰਦਾ ਜੇ ਸਾਰੇ ਉਹਨੂੰ ਵੀ ਚਾਹੁੰਦੇ ਨੇ ਅੱਬੇ ਜਾਣੇ ਆਪਣਾ ਸਾਰੇ ਉਹਨੂੰ ਆਪਣਾ ਕਰਕੇ ਬੰਦੇ ਨੇ ਹੋਈ ਨਹੀਂ ਉਹਨੂੰ ਕਹਿੰਦਾ ਪਰਾਇਆ ਕਈ ਨਾ ਚਾਹੇ ਚਿੱਤ ਕਿਸੇ ਦਾ ਚਿੱਤ ਨਹੀਂ ਟੋਹਦਾ ਕਿਸੇ ਨੂੰ ਐਸੀ ਗੱਲ ਨਹੀਂ ਕਹਿੰਦਾ ਜਿਹਦੇ ਨਾਲ ਉਹਦਾ ਬੰਨ ਝਹੇ ਕਹਿਨੀਆਂ ਗੱਲਾਂ ਵੱਲ ਜਾਵੇ ਸਾਰਿਆਂ ਨੂੰ ਹਲਾਸ਼ੇਰੀ ਦਿੰਦਾ ਸਾਰਿਆਂ ਨੂੰ ਤਗੜੇ ਕਰਦਾ ਸਾਰਿਆਂ ਨੂੰ ਗਿਆਨ ਦਿੰਦਾ ਸਾਰਿਆਂ ਦੇ ਭਰਮ ਦੂਰ ਕਰਦਾ ਕੋਈ ਇਹ ਜਿਹਾ ਭਰਮ ਭਲੇਖਾ ਤਾਂ ਪਉਂਦਾ ਨਹੀਂ ਕਿਸੇ ਦੀ ਸੱਚ ਆਉਂਦਾ ਸਮ ਸਾਰਿਆਂ ਦੇ ਕੰਮ ਸਵਾਰਦਾ ਵਿਗਾਨ ਤਾਂ ਕਿਸੇ ਦਾ ਨਹੀਂ ਸਾਰਿਆਂ ਦਾ ਭਲਾ ਕਰਦਾ ਬੁਰਾ ਉਹ ਤੇ ਕਦੇ ਹੁੰਦਾ ਹੀ ਨਹੀਂ ਹਾਂਜੀ ਇਹ ਵਾਸਤੇ ਕਿਹਾ ਜੀ ਅਪਣੇ ਉੱਤਾਰਨ ਵਾਸਤੇ ਉਦਲੇ ਵਾਸਤੇ ਕੇਹੋ ਜੀ ਮਹੱਲਾ ਪੰਜਵਾਂ ਗੁਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ ਸੋਹੀ ਸੁਹਾਵਾ ਥਾਨ ਜਿੱਥੈ ਪਰੀਏ ਨਾਨਕ ਜੀ ਤੂੰ ਉੱਠਿਆ ਉਦੜਾ ਜਿਹੜਾ ਲਾਲ ਸੀ ਨਾ ਗੁਰਬਾਣੀ ਜਿਹੜੀ ਗੁੱਦੀ ਕਰ ਰਹੀ ਸੀ ਕੋਹਜ ਭੇਦ ਸੀ ਜਿਹੜਾ ਗੁਰਬਾਣੀ ਦਾ ਉਹ ਸਮਝ ਆ ਗਿਆ ਉਹ ਲਾਲ ਲੱਭ ਗਿਆ ਉਹ ਤਤ ਗਿਆਨ ਤਤ ਲੱਭ ਗਿਆ ਤਤਰੀ ਸਮਝ ਆ ਗਈ ਮੱਥੇ ਸਮਝ ਆਈ ਮੱਥੇ ਹੀ ਪ੍ਰਗਟ ਪਿਆ ਬਸ ਮੱਥੇ ਤੋਂ ਵੀ ਦਿਖਣ ਲੱਗ ਗਿਆ ਜਿਹੜੇ ਤੇ ਵੀ ਝਲਕ ਆਉਣ ਲੱਗੀ ਉਹਦੀ ਉਹ ਸਮਝਦੀ ਜਿਹੜੀ ਝਲਕ ਸੀ ਚਿਹਰੇ ਤੋਂ ਪਤਾ ਲੱਗਣ ਲੱਗਿਆ ਪ੍ਰਗਟ ਥੋਈ ਸਹਾਵਾ ਹਿਰਦਾ ਸੁਣਾ ਉਹ ਹਿਰਦਾ ਸਵਾਬ ਹੋ ਜਾਂਦਾ ਜਿੱਥੇ ਪ੍ਰਿਯੇ ਨਾਨਕ ਜੀ ਤੂੰ ਉਠਿਆ ਜਿੱਥੇ ਨਾਨਕ ਜੀ ਕਹਿੰਦਾ ਮੈਂ ਪਰਮੇਸ਼ਰ ਤੂੰ ਵਿੱਚ ਉਠਿਆ ਜਿੱਥੇ ਤੂੰ ਜਿੱਥੇ ਤੂੰ ਆਕੇ ਬੋਲੇ ਆ ਜਿਹਨੂੰ ਤੈਂ ਬੁਲਾਇਆ ਆਕੇ ਆਪ ਜਿੱਥੇ ਸ਼ਬਦ ਗੁਰੂ ਪ੍ਰਗਟ ਹੋ ਗਿਆ ਉਠਿਆ ਤੂੰ ਉਹ ਤਾਂ ਠੰਸ ਸੁਹਾਵੇ ਹੈ ਜਿਹੜੇ ਪਸੰਦ ਦੇ ਹਿਲਦੇ ਚ ਵੀ ਆਕੇ ਤੂੰ ਉਠਣ ਹੋਰਦੇ ਸੁਹਾਵੇ ਹੋਗੇ ਸਾਰੇ ਕਾਰਨ ਹੋ ਜੀ ਦੇ ਹਰ ਦੇ ਜੁਟੇਗਾ ਉਹ ਵੀ ਸਵਾਬਾ ਹੋ ਜਾਊਗਾ ਜਿੱਤੇ ਗੁੱਟਦਾ ਰਿਆ ਸਵਾਬਾ ਹੁੰਦਾ ਚਲਿਆ ਗਿਆ ਨਾਲ ਦੀ ਨਾਲੇ ਹਾਂਜੀ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਝ ਤੇਰਾ ਬੰਦਾ اے ਪਰਮੇਸ਼ਰ ਤੂੰ ਹੀ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਮੈਨੂੰ ਕੀ ਦੀ ਗੁਸ਼ਤ ਮੈਨੂੰ ਹੋਰ ਕਿਸੇ ਦੇਵੀ ਦੇਵਤੇ ਦੀ ਕੋਈ ਲੋੜ ਨਹੀਂ ਕਿਸੇ ਬ੍ਰਹਮਾ ਵਿਸ਼ਣ ਚਿੱਪੀ ਆ ਹੋਰ ਕਿਸੇ ਤੇਰੀ ਜਿਹੜਾ ਕਿਤੋਂ ਪੈਦਾ ਹੋਇਆ ਹੋਇਆ ਸਮਸਾਰਚ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਕਿਸੇ ਦੀ ਅਦੀਦਗੀ ਨਹੀਂ ਹੈ ਤਾਂ ਦਾ ਸਾਲ ਮੈਨੂੰ ਐ ਦਿੱਤਾ ਉਹਨਾਂ ਨੂੰ ਦੀ ਬਖਸ਼ਿਆ ਉਹ ਚੀਜ਼ਾਂ ਜਿਹਨਾਂ ਨੂੰ ਲੋਕ ਮੰਨਦੇ ਨੇ ਮੈਨੂੰ ਉਹ ਚੀਜ਼ਾਂ ਬਖਸ਼ਦੀ ਹੈ ਜਿਹੜੀਆਂ ਕੋਲ ਨਹੀਂ ਸੀ ਤੂੰ ਜੋ ਸਭ ਮੈਨੂੰ ਸੌਂਪਿਆ ਤੇਰਾ ਬੰਦਾ ਉਹ ਫੇਰ ਸਾਰੇ ਮੈਨੂੰ ਖਜ਼ਾਨਾ ਤਾਂ ਮੈਨੂੰ ਸੌਂਪਦਾ ਖਾਜੋਪਿਆ ਜਾਂ ਤੇਰਾ ਬੰਦਾ ਆ ਜਾਂਦ ਮੈਂ ਤੇਰਾ ਬੰਦਾ ਹੋ ਗਿਆ ਜਦ ਮੈਂ ਤੇਰੇ ਪਹਾਣੇ ਚ ਚੱਲਣ ਲੱਗਿਆ ਜਦ ਪਹਾਣੇ ਚ ਚੱਲਣਾ ਬੰਦ ਲਿਆ ਤੈਨੂੰ ਪ੍ਰਵਾਣ ਹੋ ਗਿਆ ਤਾਂ ਢੋ ਲਿਆ ਸਾਰੇ ਪਾਸਿਆਂ ਤੋਂ ਮੈਨੂੰ ਪਰਖ ਲਿਆ ਵੀ ਹਾਂ ਉਹਨੇ ਇਤਵਾਰ ਤੇ ਕੀਤਾ ਜਾ ਸਕਦਾ ਤਾਂ ਮੈਨੂੰ ਸਾਰਾ ਇਹ ਖਜ਼ਾਨਾ ਸੌਪਿਆ ਜਦੋਂ ਮੈਂ ਤੇਰਾ ਬੰਦਾ ਹੋਇਆ ਤਨ ਸੋਪਿਆ ਠੀਕ ਹੈ ਜੀ ਇਹ ਮਨ ਚਿੱਤ ਨੂੰ ਕਹਿੰਦਾ ਹੈ ਪਰਮੇਸ਼ਰ ਨੂੰ ਕਹਿੰਦਾ ਹੈ ਅੱਛਾ ਜੀ ਸਤਗੁਰ ਜੀ ਬੁੜੀ ਸੋਪਿਆ ਠੀਕ ਹੈ ਜੀ ਲਕshmi ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨ ਦਾ ਲਕshmi ਮੈਂ ਜਿੱਥੇ ਤਾਈ ਦੇਖਦਾ ਲੇਆ ਮਾਰਦਲ ਉੱਥੇ ਤਿਆਂ ਮੈਨੂੰ ਦਿਨ ਦਾ ਸਭ ਕੁਝ ਗਿਆਨ ਮੇਰੀ ਦ੍ਰਿਸ਼ਟੀ ਕਿਤੇ ਨਹੀਂ ਰੁਕਦੀ ਹੈ ਟੋੜਨਾ ਆ ਬਈ ਟੋੜ ਤੇ ਸੇ ਚੀਜ਼ ਦੀ ਜਿਹੜੀ ਚੀਜ਼ ਇੱਛਾ ਹੁੰਦੀ ਹੈ ਜੋ ਮੰਨਦਾ ਠਾਕੁਰ ਆਪਣੀ ਅਪੇਸ ਸੋਈ ਦੇਵਾ ਜਿਹੜੀ ਚੀਜ਼ ਦੀ ਮੈਨੂੰ ਭੁੱਖ ਹੁੰਦੀ ਹੈ ਗਿਆਨ ਦੀ ਉੱਥੇ ਤੱਕ ਦਾ ਹੀ ਦਰਸ਼ਤ ਕਰਾ ਦਿੰਦਾ ਤੂੰ ਉੱਥੇ ਹੀ ਦ੍ਰਿਸ਼ਟੀ ਪਹੁੰਚਾ ਦਿੰਦਾ ਮੇਰੀ ਖਾਏ ਖਰਚ ਰਹਿੰਦਾ ਖਾਂਦਾ ਵੀ ਨਾ ਆਪ ਵੀ ਖਾਂ ਲੋਕਾਂ ਨੂੰ ਵੀ ਖਰਚਦਾ ਲੋਕਾਂ ਨੂੰ ਵੀ ਦੱਸ ਦਿੰਨਾ ਨਾਨਕ ਨੇ ਦੱਸਤਾ ਨਾ ਸੱਚ ਹੈ ਤੇ ਪਪਨਾ ਤੇ ਆਪਾ ਬਣਾ ਤੇ ਜਲ ਹੋਏ ਕਿਵੇਂ ਦੱਸਿਆ ਸੀ ਜਿਵੇਂ ਦੱਸਿਆ ਸੀ ਜਲ ਤੇ ਤਿਰਫ ਬਣ ਸਾਜਿਆ ਘਟ ਘਟ ਜੋਤ ਸਮੋਏ ਉਹ ਗੱਲ ਇੱਥੇ ਦੱਸੀ ਹੋਈ ਹੈ ਆ ਗੱਲ ਹੈ ਠੀਕ ਹੈ ਜੀ ਅੱਕ ਚਰਾ ਸੀ ਸਭ ਸਿਵ ਕਰੰਦਾ ਅੱਕ ਚਰਾ ਲੱਖ ਜਿੰਨ ਜੀਵਨ ਹੈ ਧਰਤੀ ਹੈ ਮੇਦ ਸਭ ਤੇਰੇ ਹੋ ਕੁ ਜਿੰਨੇ ਇਸਾ ਸੇਵਾ ਹੀ ਕਰਦੇ ਨੇ ਤੇਰੇ ਕਾਰੇ ਲਾਏ ਹੋਏ ਨੇ ਸੂਰਜ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਭੈ ਵਿੱਚ ਸੁਧ ਸੁਧ ਬੁੱਧ ਸੁਨਰਾਤ ਭੈ ਜਾਤ ਆਕਾਸ਼ ਸਾਰੇ ਭੈ ਚਲਦੇ ਨੇ ਜਨਤਾ ਕੇ ਬਸ ਕਛਲੀ ਸਭ ਚਲੇ ਚਲਾਏ ਕੋਈ ਤੇ ਤੋ ਆਕੀ ਨਹੀਂ ਹੈਗਾ ਸਭ ਤੇਰੇ ਹੁਕਮ ਚੱਲ ਰਹੇ ਨੇ ਸਭ ਤੇਰੀ ਸੇਵਾ ਸੇਵਾ ਕਰਦੇ ਨੇ ਸੇਵਾ ਲੈ ਹੈ ਠੀਕ ਹੈ ਜੀ ਲక్ష్ਮੀ ਤੋਂ ਭਾਵ ਲక్ష్ਮੀ ਨੀ ਹੈ ਬੀ ਜਿਹੜਾ ਧਨ ਹੋਵੇ ਨਾਮ ਧਨ ਸਭ ਜੋ ਅੱਛਾ ਜੀ ਖਰਚਾ ਦਿੱਤ ਖਸਮ ਦੀ ਹੈ ਜੀ ਹਾਂ ਤੇ ਲੱਭੀ ਤਸਲ ਵਿਹਾਲੀ ਹੈ ਠੀਕ ਹੈ ਜੀ ਤੇ ਉਹਨੂੰ ਮੈਂ ਆਪ ਵੀ ਖਾ ਰਿਆ ਨੂੰ ਦੱਸ ਰਿਹਾ ਦੇ ਰਿਹਾ ਖਰਚ ਰਿਹਾ ਉਹਨਾਂ ਵਾਸਤੇ ਹਾਂ ਠੀਕ ਹੈ ਜੀ ਨਾਮ ਦਾ ਵਪਾਰ ਹੈ ਨਾ ਆਦਲ ਰੋਮੇ ਕੇ ਵਪਾਰੀ ਹਾਂ ਜੀ ਇਹ ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛੈ ਜਾ ਹਰ ਬਖਸ਼ਣ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਤੇ ਜਿਹੜੇ ਵੈਰੀ ਵੀ ਨੇ ਮੇਰੇ ਨਾਲ ਬੈਲ ਵੀ ਕਰਦੇ ਨੇ ਬੈਂਟ ਬੁਰੇ ਦਾ ਭਲਾਈ ਕਰਦਲ ਬਿੱਤਰ ਕੀਤੇ ਆ ਮੈਂ ਮੰਗਾ ਮੁੰਡਾ ਮੈਂ ਕਿਸੇ ਦਾ ਮੁੰਡਾ ਨਹੀਂ ਮੰਗਦਾ ਇਹਨਾਂ ਦਾ ਬੁਰਾ ਜਵੇ ਕਿਸੇ ਦਾ ਇਹ ਨਹੀਂ ਮੰਗਦਾ ਬ ਇਹਨਾਂ ਦਾ ਭਲਾ ਹੋਵੇ ਇਹਨਾਂ ਦਾ ਭਲਾ ਹੋਵੇ ਇਹ ਕੋਈ ਨਾ ਪੁੱਛੀ ਫੇਰ ਹਲੇ ਕੰਦੀ ਨਾ ਪੁੱਛਣਾ ਲੇਕਾ ਕੁਝ ਹੈ ਕਿਸੇ ਦਾ ਬੁਰਾ ਨਹੀਂ ਹੈ ਸੋਚਦਾ ਮੇਰਾ ਵੀ ਲੇਕਾ ਕਿਸੇ ਨੂੰ ਪੁੱਛਣਾ ਪੁੱਛੀ ਜਾਂ ਹਰ ਬਖਸ਼ਦ ਦਾ ਯੀ ਨਾ ਹਰਨੇ ਮਖਤੌਦਾ ਲੈ ਕੇ ਪੁੱਛੂ ਕੋਣ ਉਹਦਾ ਨਹੀਂ ਕੋਈ ਕੋਈ ਦਸਤਾਵੇਜ਼ ਲੈਖਾ ਹਰਨੇ ਬਖਸ਼ੀ ਹੋ ਗਈ ਨਹੀਂ ਤੇ ਉਹਦਾ ਲੈਖਾ ਉਹਦੇ ਕਾਨਕ ਪਾਟੇ ਨਾਲ ਦੇ ਤੱਕ ਪਾਟਿਆ ਫਾਈਲੇ ਪਾਟਤੀ ਫਾਈਲ ਹੈ ਜੀ ਦੇਖਾਂਗੇ ਨਾ ਪੁੱਛਣ ਹਾਂ ਇਹ ਜਿਹੜੇ ਵੈਰੀ ਐ ਇਹ ਕਾਮ ਕਰੋ ਲੋਮੋ ਹੈ ਜੀ ਸਹੀ ਅੱਛਾ ਜੀ ਹੋਰ ਜੀ ਅੱਛਾ ਬਾਹਰ ਸੀ ਵੈਰੀ ਹੋਰਾਂ ਨਾਲ ਵੈਰ ਉਹ ਤਾਂ ਵੈਰੀ ਰਹੇ ਨਹੀਂ ਜਿਹੜੇ ਸੰਸਾਰ ਦੇ ਲੋਕ ਜਿਨ੍ਹਾਂ ਦੀਆਂ ਮੱਤਾਂ ਦੂਜੀਆਂ ਨੇ ਨਾ ਉਹ ਐਰ ਕਰਦੇ ਨੇ ਨਾ ਗੁਰਮਤ ਨਾਲ ਹਾਂਜੀ ਦੂਜੀਆਂ ਮੱਤਾਂ ਵਾਲਿਆਂ ਦੀ ਗੱਲ ਹੈ ਅਸੀਂ ਉਹਨਾਂ ਦਾ ਵੀ ਭਲਾ ਹੀ ਕਰ ਰਹੇ ਹਾਂ ਉਹਨਾਂ ਰੂਪ ਦੇ ਜਾ ਤੁਧ ਭਾਵਨ ਦਾ ਅਨੰਤ ਪਿਆ ਸੁਖ ਪਾਇਆ ਸਾਨੂੰ ਦਾ ਆਨੰਦ ਹੈ ਸਾਡੇ ਹਿਰਦੇ ਦਾ ਆਨੰਦ ਅਨੰਤ ਵਰਤਦਾ ਹੈ ਸੁਖ ਪਾਇਆ ਸਭ ਹਰ ਪ੍ਰਕਾਰ ਦਾ ਸੁਖ ਪਾ ਲਿਆ ਸੀ ਜੋ ਇਹ ਤਾਂ ਸੁਖ ਸਾਗਰ ਦੀ ਗੱਲ ਹੋ ਰਹੀ ਹੈ ਜੀ ਉਹ ਤਾਂ ਜਿਉਂ ਦਾ ਸੁਖ ਸਾਗਰ ਜਿਆ ਹੈ ਇਹ ਤਾਂ ਹੈ ਇਹਦੇ ਨਾਲ ਜਾਣੂ ਬੁੱਲਸ ਮਿਲ ਗੁਰ ਗੋਬਿੰਦ ਬਿਲਕੁਲ ਬੋ ਦਿੱਤਾ ਜਾਂ ਗੁਰਾਰ ਗੋਬਿੰਦ ਦਾ ਦੋਏ ਮਿਲ ਕੇ ਗੁਰਾਰ ਗੋਬਿੰਦ ਦਾ ਦੋਏ ਕੇ ਇੱਕ ਹੋ ਗਏ ਤੇ ਸੁਖ ਸੰਤਰੀ ਉੱਤੇ ਠੀਕ ਗੋਬਿੰਦਾ ਕਿਹਨੂੰ ਜੀ ਜਿਹੜਾ ਚੇਤਨ ਨੂੰ ਅਜਲ ਨੂੰ ਜੋੜਦਾ ਉਹ ਕੌਣ ਹੋਇਆ ਉਹ ਅੱਛਾ ਜੀ ਹੁਕਮ ਨਾਲੇ ਮਿਲਣਾ ਹੁਕਮ ਜੇ ਹੁਕਮ ਜੇ ਸਮਾਉਣਾ ਹੁਕਮ ਆਵੇ ਹੁਕਮੇ ਜਾਏ ਹੁਕਮੇ ਰਹੇ ਸਮਾਈ ਹੁਕਮ ਇਹ ਸੰਖਾ ਕਰਦਾ ਹੈ ਹੁਕਮ ਜਿ ਸਮਾਇਆ ਕਾਜ ਸਵਾਰੀ ਹੈ ਜਾ ਤੁਧ ਭਵੰਦਾ ਸਭੇ ਕਾਜ ਸਵਾਰੀ ਹੈ ਸਾਰੇ ਕਾਜ ਸਵੰਨ ਜਾਂਦੇ ਨੇ ਜਾਣਦੇ ਨੇ ਜਾ ਤੁਧ ਭਵੰਦਾ ਕਾਜ ਸਵੰਨ ਜਾਣਦੇ ਨੇ ਜੇ ਤੂੰ ਚਾਹਣਾ ਹੋਵੇ ਤਰਕਾਇ ਕੋਈ ਨਾ ਸਿਭੜੇ ਜੇ ਤੁਧ ਭਵੰਦਾ ਜਾ ਤੈਨੂੰ ਭਾਗਿਆ ਨਾ ਜੀਵ ਤੇਰੇ ਮਤਲਬ ਦਾ ਹੋ ਗਿਆ ਤਾਂ ਇਹਨੂੰ ਪਾਸ ਕਰਤਾ ਸਰੇ ਦੇ ਕਾਸਬਈ ਸਵਾਲ ਸਤਗੁਰੂ ਸਿੱਕੇ ਬੰਦਲ ਕਾਟੇ ਠੀਕ ਹੈ ਜੀ ਇੱਥੇ ਸੱਤਵੀਂ ਪੌੜੀ ਦੀ ਸਮਾਪਤੀ ਹੈ ਜੀ